ਸ਼ਲੋਕ ਮਹੱਲਾ ਤੀਜਾ ਫੜ ਫੜ ਪੰਡਿਤ ਮੋਨੀ ਠੱਕੇ ਦੇ ਸੰਤਰ ਪਵ ਠੱਕੇ ਭੀਖ ਧਾਰੀ ਦੂਜੇ ਪਾਏ ਨਾਉ ਕਦੇ ਨਾ ਪਾਇਨ ਦੁਖ ਲਾਗਾ ਅਤ ਭਾਰੀ ਫੜ ਫੜ ਪੰਡਿਤ ਇਨਾ ਪੜ ਕੇ ਮੂੰਹ ਤਾਲਤ ਕਰਦੇ ਨੇ ਕੇ ਆਪਣੀ ਗੰਦਾ ਕਰਦੇ ਪਰ ਇਹ ਦੋ ਮਾਤਰਾਵਾਂ ਦਾ ਵੀ ਬਣ ਸਕਦਾ ਹਾਂਜੀ ਫਿਰ ਇਹ ਹਾਸ ਹੋ ਜਾਂਦਾ ਸਿਰ ਤੋਂ ਗੱਜੀ ਔਰਤ ਅੱਛਾ ਜੀ ਜੇ ਉੱਤੇ ਹੋੜਾ ਨਾ ਹੁੰਦਾ ਫਿਰ ਬੁੱਢੀ ਬਣ ਜਾਂਦਾ ਰਿਸ਼ੀ ਬੁੱਢੀ ਇਹ ਹੈ ਮੂੰਹ ਤਾਲਤ ਕਰਨ ਵਾਲੇ ਅੱਛਾ ਜੀ ਨਾਇਸ ਸੇ ਤੋਂ ਨਾ ਰਿਸ਼ਾਂ ਦੇ ਵਿੱਚ ਨਾ ਰਿਸ਼ੀ ਮੂਦਿ ਲਿਸਨ ਵਿੱਚ ਤੀਜਾ ਲਫਜ਼ ਹੈ ਪੜ ਪੜ ਪਰਤ ਤੋ ਮੋਦੀ ਠੱਕੇ ਤੇ ਸੰਤਰ ਆ ਰਹੀ ਹੈ ਜੋਗੀ ਨੇ ਤੇ ਆ ਰਹੀ ਹੈ ਦੇਸਦਾਰ ਦੇ ਭੰਗ ਤੇ ਠੱਕ ਗਏ ਬੇਸੜ ਪੜ ਗਏ ਕੋ ਪੜ ਠੱਕੇ ਕੋਲੀ ਭੂਰ ਰੱਖ ਰੱਖ ਕੇ ਠੱਕੇ ਕਿਸੇ ਨੂੰ ਕਾਖੀ ਨਹੀਂ ਮਿਲੇ ਸਭ ਜਿਹੜੀ ਕਿਸੇ ਨੂੰ ਵੀ ਆਈ ਕੀ ਆਪਣਾ ਮੋੜ ਨਹੀਂ ਪਛਾਣਿਆ ਕਿਸੇ ਨੇ ਆਪਣੇ ਆਪ ਨੂੰ ਨਹੀਂ ਦੇਖਿਆ ਕਿਸੇ ਨੇ ਆਤਮ ਤਰਚੁਲਦੀ ਹੋਇਆ ਕਿਸੇ ਨੂੰ ਇਹਨਾਂ ਲੋਕ ਦੀ ਸਮਝੇ ਨਹੀਂ ਆਈ ਕੀ ਹੁੰਦੇ ਨੇ ਹਾਂਜੀ ਦੂਜੇ ਪਾਇ ਮਾਇਆ ਦੀ ਇੱਛਾ ਮਾਇਆ ਦੀ ਹੈ ਸਾਰਿਆਂ ਨੂੰ ਸੰਸਾਰੀ ਸੁਖ ਦੀ ਇੱਛਾ ਹੈ ਸੰਸਾਰੀ ਵਡਿਆਈ ਦੀ ਹੈ ਸੰਸਾਰੀ ਤਾਂ ਦੌਲਤ ਦੀ ਹੈ ਤੇ ਨਾਉ ਕਿੱਥੋਂ ਬਣਨਾ ਦੂਜੇ ਪਾਇ ਦੋ ਕਦੇ ਨਾ ਪਾਇਆ ਨਾਮ ਕਿਸੇ ਨੇ ਨੀ ਪਾਇਆ ਕਦੇ ਵੀ ਨਾ ਪਾਇਆ ਜਾ ਸਕਦਾ ਸੁਖ ਲਾਗਾ ਅਤਿ ਭਾਰੀ ਅਤਿ ਭਾਰੀ ਸੁਖ ਲੱਗੂਗਾ ਮਰਨਾ ਸੰਸਾਰ ਛੱਡਣਾ ਪੈ ਜਾਣਾ ساری ਉਮਰ ਦੀ ਕਮਾਈ ਛੱਡਣੀ ਪੈ ਜਣੀ ਏ ਚਲੀ ਜਾਣੀ ਏ ਸਭ ਕੀਤਾ ਸੰਸਾਰ ਤੇ ساری ਉਮਰ ਦਾ ਐਵੇਂ ਚਲੇ ਜਾਂਦਾ ਹਾਂਜੀ ਮੂਰਖ ਅੰਦੇ ਤ੍ਰੈ ਗੁਣ ਸੇਵੈ ਮਾਇਆ ਕਹਿ ਬਿਵਹਾਰੀ ਅੰਦਰ ਕਬੜ ਉਧਰ ਭਰਨ ਕਹਿ ਤਾਈ ਪਾਠ પડેગા વાની આ દેખો દૂર કાં ਨਾ ਇਹਨਾਂ ਨੂੰ ਸਰਗੁਣ ਦੇ ਇਹਨਾਂ ਨੂੰ ਸਰਗੁਣ ਮੰਨ ਕੇ ब्रह्मा ਅ ਵਿਸ਼ਣੂ ਸ਼ਿਵੀ ਨੂੰ ਪੂਜਦੇ ਨੇ ਤੇ ਕੋ ਹਾਲ ਬਣਾਇਆ ਹੋਇਆ ਨੇ ત્રયગુਣ ਸਰਗੁਣ ਪ੍ਰਭ ਕਹਿੰਦੇ ਨੇ ਇਹਨੂੰ ਇਹਦੀ સેવા ਕਰਦੇ ਨੇ ਇਹຕະ દેવાય ਦੇ ਗੁਰ ਕਰਕੇ ਦੇਹ ਦਾ ਰੀਲੂ ਸਰਗੋਡ ਬਣਾ ਕੇ ਮਾਇਆ ਨੂੰ ਹੁਜਣ ਹੈ ਗੁਰ ਕਾੰਬ ਦੇ ਤਰਾਗਣ ਸੇ ਬੰਨ ਤਨਾਗੁ ਤਰਾਗੋੜੀ ਮਾਇਆ ਨੇ ਮਾਇਆ ਜੇ ਰਹਿਣਾ ਤੋਂ ਗਾਹ ਕਿ ਮਚਾਂ ਮਾਇਆ ਤਾਂ ਛੱਡਣੀ ਦੀ ਅਕਟਰ ਕਪਟਰ ਅਕਟਰ ਕਪਟਾ ਜੇ ਕੋ 10ਵੀਂ ਤੋਂ ਮੈਂ ਬੁਲ ਦਿੱਤਾ ਹਾਂ ਲਈ ਉਹ ਤਾਂ ਭਾਣਾ ਕਿ ਤਾਈ ਪੇਟ ਭਰਨ ਵਾਸਤੇ ਪਾਠ ਪੜਿਨ ਗਵਾਰੀ ਗਵਾਰੇ ਗਵਾਲ ਨੇ ਪਾਠ ਪੜਦੇ ਨੇ ਸਾਰੇ ਕੁਛ ਅਸੀਂ ਇਹ ਅੱਜ ਕੀ ਇਹੀ ਕੁਛ ਕਰ ਰਹੇ ਜੀ ਲੋ ਸਾਰੇ ਕਹ ਰਹੇ ਨੇ ਸਤਵੀ ਜੀ ਕੁਛ ਕਰ ਰਹੇ ਨੇ ਕਿਸਾਨ ਵਾਲੇ ਵੀ ਇਹੀ ਕੁਛ ਕਰ ਰਹੇ ਨੇ ਕੁਦਾਰਿਆਂ ਵੀ ਇਹੀ ਕੁਛ ਕਰ ਰਹੇ ਨੇ ਸਾਰੇ ਇਹੀ ਕੁਛ ਚੱਲਦਾ ਸਾਡੇ ਜਿਹੜੇ ਆ ਵਿਦਿਆ ਕੀਤੀ ਸੀ ਜਿਹੜੀ ਗੱਲ ਦੀ ਉਹ ਅਸੀਂ ਖੁਦ ਕਰ ਰਹੇ ਹਾਂ ਅੱਤਣ ਨਾਲ ਕਰ ਲੈਣਾ ਤੇ ਇਹਦੀ ਪਰਵਾਹ ਨਹੀਂ ਸਾਡੇ ਗੁਰੂ ਕਹਿੰਦਾ ਰਹੇ ਕੈਂਦੀ ਰਹਿ ਮਿਹਰਬਾਨੀ ਅਸੀਂ ਦਿਲੋਂ ਕਰਦੇ ਜਿਹੜਾ ਜੀਨੇ ਜੋਰ ਲਾਉਣੇ ਲਾ ਲਵੇ ਹਾਂਜੀ ਇਹ ਵਾਲੀ ਤੁਕ ਪੜ ਕੇ ਤਾਂ ਜਾਂ ਤਾਂ ਪੈਸੇ ਪਾਠ ਬੰਦ ਕਰ ਪਾਠ ਬੰਦ ਕਰ ਲੈ ਕਪੜਤਾ ਹੈ ਜਾਂ ਕਪਤੀ ਪਾਠ ਬੰਦ ਕਰਦਾ ਹੁੰਦਾ ਕਪੜਤਾ ਆ ਗਿਆ ਫਿਰ ਕਪਤੀ ਉਸੜ ਭੰਡ ਕੇ ਤਾਂ ਉਹ ਕਾਹਦੇ ਕਰ ਅਦਵਾ ਲੱਗੀ ਹੋਈ ਆ کورٹ ਵਿੱਚ ਵੀ ਜੇ ਕੇਸ ਚਲੇ ਗਿਆ ਵੀ ਤਾਂ ਵੀ کورٹ ਗੱਡੂਗੀ ਕਿ ਤੁਸੀਂ ਕਮਤੀ ਹੋ ਉਦੋਂ ਪੜ੍ਹ ਸੋ ਸੁਖ ਪਾਏ ਮਾਰੀ ਨਾਨਕ ਪੜਨਾ ਗੁਣਨਾ ਇੱਕ ਨਾਉ ਹੈ ਬੁੱਝੇ ਕੋ ਵਿਚਾਰੀ ਸਤ ਸੇਵੇ ਸੋ ਸੁਖ ਪਾਏ ਪਰ ਉਹ ਨਹੀਂ ਸੇਵਾ ਕਰਦਾ ਨਹੀਂ ਸੋਖ ਪਾਊਗਾ ਉਹ ਉਹ ਤਾਂ ਕੋਈ ਸੋਖਾ ਨਹੀਂ ਸਕਦਾ ਜਿਹਨਾਂ ਹੋਂਦ ਵਿੱਚੋਂ ਮਾਰੀ ਜਿਹਨੇ ਆਪਣੇ ਵਿੱਚੋਂ ਕਾਲ ਨੂੰ ਮਾਰ ਲਿਆ ਉਹ ਸੋਖ ਪਾਊਗਾ ਨਾਨਕ ਪਰਨਾ ਨਾਮ ਹੈ ਪੂਜੇ ਨਾਮ ਹੈ 17 ਪਰ ਉਹ ਕੋਈ ਬਚਾਇਆ ਨਹੀਂ ਬਾਕੀ ਦਾ ਸਾਬ ਉਹਤਲਾ ਜਿਹੜਾ ਕੁਝ ਹੈ ਪਖੜਦਾ ਉੱਤੇ ਕੁਝ ਕਰ ਰਹੇ ਸਰਦਾਰੀ ਕਰ ਰਹੇ ਨੇ ਵਾਇਦਾ ਵਿਹਾਰ ਕਰ ਰਹੇ ਨੇ ਜਿੰਨੀ ਸਾਡੀ ਮਰਿਆਦਾ ਹੈ ਜੋ ਦੱਸਿਆ ਜਾਂਦਾ ਹੈ ਉਹ ਸਭ ਇਹਦੇ ਵਿੱਚ ਹੀ ਆ ਜਾਂਦਾ ਹੈ ਜੀ ਨਾਨਕ ਪੜਨਾ ਗੁਣਵਾ ਫਰਿਆਦਾ ਵੀ ਤਾਂ ਕੱਬ ਖਰਾਬ ਕੀਤਾ ਜਾਂ ਦੁਨਿਆਦਾ ਘਰਵਾਲੀ ਰਹਿਤ ਹੋਰ ਕੁਝ ਕਹਿੰਦੀਆਂ ਫਰਿਆਦਾ ਹੋਰ ਕੁਝ ਕਰਦੀ ਆ ਪੰਕਤੀ ਰਹਿਤ ਵਾਲੀ ਹੈ ਤਾਂ ਪੰਕਤੀ ਰਹਿਤ ਵਾਲੀ ਹੈ ਠੀਕ ਹੈ ਨਾਨਕ ਪੜਨਾ ਗੁਣਨਾ ਇੱਕ ਨਾਉ ਹੈ ਬੁੱਝੇ ਕੋ ਵਿਚਾਰੀ ਇਹ ਵਿਚਾਰ ਨਾਲ ਬੁੱਝਣੀ ਸੀ ਗੱਲ ਕੁਰਬਾਨੀ ਚ ਐਸਾ ਕੀ ਇਹ ਗੱਲ ਕਰਦੇ ਤੇ ਪੜਨ ਗੁਣਦੇ ਉਦੋਂ ਕਪਟ ਉਦੋਂ ਪੜ ਕੇ ਥਾਈ ਪਾੜ ਪੜੇ ਗਾਵਾਰੀ ਇਹ ਸੀ ਗੱਲ ਸੀ ਮਰਿਆਦਾ ਉਕਲੇ ਨੂੰ ਠੀਕ ਨਦੀ ਹੈ ਰਹਿਤ ਉੱਲੇ ਨੂੰ ਗਲਤ ਮੰਨੀ ਹੈ ਥੱਲੇ ਵਾਲੇ ਨੂੰ ਠੀਕ ਮੰਨੀ ਹੈ ਰਹਿਤ ਮਰਿਆਦਾ ਦਿੱਤਾ 1-2 ਦਿਨ ਦੀ ਕਠੀਆ ਚੱਲ ਸਕਦੀ ਹੂ ਇਹਨਾਂ ਨੇ ਕਠੀਆਂ ਕਰੀਆਂ ਆਂਆਂ ਜਾਣਾ ਹਰ ਹੁਕਮ ਪਾਇਆ ਕਿਆ ਕੀਜੈ ਜਿਸ ਕੀ ਲੈ ਜਾਏਗਾ ਰੋਸ ਕਿਸੈ ਸਿਉ ਕੀਜੈ ਕਹਤੇ ਜਾਣਾ ਸਾਡੇ ਹੁਕਮ ਪਾਇਆ ਕਿਆ ਕੀਜੇ ਸਰੀਰ ਆਇਆ ਸੀ ਦੁਸਰਾ ਇਹ ਆਇਆ ਸੀ ਯਾ ਜਾਣਾ ਸਰੀਰ ਵਿੱਚ ਨਹੀਂ ਡਾਲ ਜਾਣਾ ਇਹਦਾ ਸਰੀਰ ਦਾ ਕਪੜਾ ਵੀ ਲੈ ਜਾਂਦੇ ਤੇ ਜਾਵਣੋ ਜਾਣਾ ਆਇਆ ਤਾਂ ਸਰੀਰ ਕਰਕੇ ਨੁੰਦਾ ਸੀ ਜਾਊਗਾ ਸਰੀਰ ਵਿੱਚ ਨਹੀਂ ਡਾਲ ਜਾਣਾ ਬਿਲਕੁਲ ਇਹਨੂੰ ਦੋਸ਼ ਕਿ ਜਦ ਦੋ ਜਿੱਥੋਂ ਜਾਊਗਾ ਤਾਂ ਸਰੀਰ ਆਲਾ ਕੱਪੜਾ ਵੀ ਇੱਥੇ ਹੀ ਰਹਿ ਜਾਣਾ ਲੈ ਇੱਥੇ ਆਇਆ ਸੀ ਸਾਲ ਨੇ ਆਪਣਾ ਕੱਪੜਾ ਦੇ ਦਿੱਤਾ ਸੀ ਇੱਥੇ ਦਾ ਆਇਆ ਸੀ ਪਰ ਕੱਪੜਾ ਦਿੱਤਾ ਸੀ ਮਾਇਆ ਦਾ ਸਰੀਰ ਜਿਹੜਾ ਇੱਥੇ ਕੱਪੜਾ ਸੀ ਇੱਥੇ ਵਾਲਾ ਕੱਪੜਾ ਇੱਥੇ ਰਹਿ ਜੂਗਾ ਜਦ ਚਲੇ ਜਾਊਗਾ ਜਾਣਾ ਥਾਰੇ ਹੁਕਮ ਪਾਇਆ ਕਿਆ ਕੀ ਜਾਏ ਇਹਦਾ ਹੁਕਮ ਹਰੀਦਾ ਦਾ ਕਿਤੇ ਵੀ ਕੋਈ ਥਾਰਾ ਜੋਈਦੀ ਹੋ ਸਕਦੀ ਕੋਈ ਨਹੀਂ ਕੁਝ ਕਰ ਸਕਦਾ ਇਹ ਹੁਕਮ ਸਾਬ ਵਾਸਤੇ ਇਹ ਹਰ ਨੇ ਪਾਇਆ ਜੀ ਹੁਕਮ ਹੁਕਮ ਪਾਇਆ ਕਿ ਆ ਕੀਜੇ ਅਸਾ ਹੀ ਹੁਕਮ ਦਾ ਹੁਕਮ ਹੁਕਮ ਪਰਮੇਸ਼ਰ ਦਾ ਨਹੀਂ ਹੈ ਪਰਮੇਸ਼ਰ ਦਾ ਹੁਕਮ ਹਰ ਦੇ ਧਰੂ ਹੈ ਇਹ ਥਾਣੇਦਾਰ ਦੇ ਧਰੂ ਹੈ ਚੱਲਦਾ ਹੁਕਮ ਜੇ ਉਹ ਹਾਂ ਦੇ ਅਫਸਰ ਹੁਕਮ ਚਲਾਉਂਦੇ ਨੇ ਉਹ ਤਾਂ ਸਰਕਾਰ ਦਾ ਹੀ ਹੁੰਦਾ ریٹھاں دا فیصلہ تے حل ہے ادھر اچھا جی ہاں جی جس کی وست سوئی لے جائے گا روز کسے کیوں کیجے ہن جس کی بات سوئی لے جائے گا نہیں نہیں وستو ہے ایو لے جوں گا ہر دی وستو ہن لے جوں گا روز ऐलु कोचे हां जी गुरुमुखी होवे सो भाणा मन्ने सहज हर रस पीजे नानक सुखदाता सदा सलाहयो रसना राम रवीज पण न बनवे ताडे पुछे के कल बडी उदी सहजे हर रस पीजे बोल के केडबे फिर हर रस पीवे फिर कीलो ऑर्डर लगा दियो नानक सुखदाता सदा सलाह ਸੇ ਸੋਖਦਾ ਜਿਆਲਾ ਐਸਾ ਦਾ ਉਹ ਦੀ ਸਿਫਤਲਾ ਕਰੇ ਰਸਨਾ RAM ਰਵੀ ਜੈ ਰਸਨਾ ਦੇ ਵਿੱਚ RAM ਉਹਦਾ ਰੱਬ ਜਵੇ RAM ਉਹਦੇ ਨਿਕਲੇ ਰਸਨਾ ਚ ਜਵੇ ਰਸਨਾ ਦੇ ਵਿੱਚ ਉਹ ਤੋਂ ਬਿਨਾ ਉਹਦੇ ਵਿੱਚ ਕੁਝ ਇਹੀ ਨਿਕਲੇ RAM ਉਹਦੇ ਨਿਕਲੇ ਸਤਿਅ ਨਿਕਲੇ ਅੰਦਰੋਂ ਜਾਦੂ ਕਲੇ ਹੈ ਨਾ ਜੋ ਉਹਨੂੰ ਡਰੇੜੇ ਨਾ ਹੁੰਦੇ ਰਸਨਾ ਬੁੱਧੀ ਨੂੰ ਕਿਹਾ ਜੀ ਆਹਰ ਜਨੁ ਬੁੱਧੀ ਜੋੜਦੇ ਨਵੇਂ ਨਹੀਂ ਜਾਂਦੀ ਫਿਰ ਤੋਂ ਠੀਕ ਹੈ ਹੁਣ ਇਹ ਬਵੇਕ ਬੁੱਧੀ ਹੋ ਗਈਆਂ ਜੀ ਹਾਂ ਜੀ ਹਾਂ ਪੌੜੀ ਗੜ ਬਹੁ ਭਾਂਤ ਬਣਾਈ ਰੰਗ ਪਰੰਗ ਕਤੀਫਿਆਂ ਪਹਿਰੇ ਧਰਮਾਈ ਆ ਜਿਹੜੀ ਹੈ ਗੱਲ ਇੱਕ ਤਰ੍ਹਾਂ ਨਾਲ ਹੀ ਬਣੀ ਬਹੁਤਾਂ ਤਰ੍ਹਾਂ ਬਣੀ ਹੈ ਤਰ੍ਹਾਂ ਤਰ੍ਹਾਂ ਦੇ ਸ਼ਬੀਰ ਦੇ ਪਾਸ ਪਾਸ ਤੇ ਸਰੀਰ ਦੇ ਤੁਹਾਨੂੰ ਪਾਸਾ ਨਾਲ ਬਣਾਏ ਨੇ ਰੰਗ ਪ੍ਰੰਗ ਨੇ ਕਿਸੇ ਨਾਲ ਕੋਈ ਰੰਗ ਕਿਸੇ ਕੋਲ ਕੋਈ ਗਿਆਨ ਦਾ ਰੰਗ ਕਿਸੇ ਕੋਲ ਕੋਈ ਮੱਤਾ ਮੱਤ ਹੋਇਆ ਕੋਈ ਨਾ ਕੋਈ ਕਿਸੇ ਮਤਰਮ ਗੁੱਲੀ ਬੈਠਾ ਕੋਈ ਕਿਸੇ ਮਤਰਮ ਗੁੱਲੀ ਬੈਠਾ ਉਹ ਕਿਸੇ ਸਾਰੇ ਹੀ ਵਿੱਚ ਪਰੋਏ ਹੋਏ ਜੀ ਨਾਵਦਾਰਾਂ ਦੇ ਰੰਗ ਹੈ ਜੋਬ ਤੋਂ ਜਿਹੜੇ ਗਰੀਨਾਮ ਦੇ ਅੱਛਾ ਰੰਗ ਅਨੇਕ ਨੇ ਲੋਕਾਂ ਸਿਆਰੀ ਨਾਲ ਲਿਖਿਆ ਇਸ ਭਾਵ ਵੀ ਜਿਹੜੀ ਕਾਇਆ ਹੈ ਇਹ ਗੜ ਦੇ ਵਿੱਚ ਹੈ ਜੀ ਗੜ ਕਾਇਆ ਗੜ ਅੱਛਾ ਗੜ ਹੀ ਕਾਇਆ ਹੈ ਕਿ ਗੜ ਦੇ ਵਿੱਚ ਇੱਕ ਕਾਇਆ ਹੈ ਕਾਇਆ ਹੀ ਗੜ ਜੀ ਗੜ ਰੂਪੀ ਕਾਇਆ ਸਾਰੂਪੀ ਕਾਇਆ ਘੜੀ ਨੂੰ ਚਾਲਾ ਕਹਿ ਲੋ ਰੁਗਾ ਘੜੀ ਹੋਈ ਬੈਠੀ ਅੱਛਾ ਜੀ ਘੜੀ ਠੀਕ ਹੈ ਲਾਲ ਸੁਪੇਰ ਦੁਲੀਚੇ ਆ ਬਹੁ ਸਵਾ ਬਣਾਈ ਦੁਖ ਖਾਣਾ ਦੁਖ ਗਰਬ ਹੈ ਗਰਬਾਈ ਨਾਲ ਸਫੇਦ ਦੁਲੀਚੇ ਕਿਸੇ ਨੇ ਲਾਲ ਨੇ ਕਿਸੇ ਨੇ ਸਫੇਦ ਨੇ ਰਾਸ ਸਫੇਦ ਆ ਕੋਈ ਲਾਲ ਹੈ ਜਿਵੇਂ ਜਿਵੇਂ ਕੋਈ ਆਪਣੀ ਮਤ ਅਗੇ ਉਹਦੇ ਚੀਹਾਂ ਪੋ ਬਣਾਈ ਸਵਾ ਦੇ ਵਿੱਚ ਪਾਸ ਪਾਸ ਦੀ ਸਵਾ ਬਣਾਈ ਹੋਈ ਹੈ ਸਾਰਿਆਂ ਨੇ ਸਾਰਿਆਂ ਨੇ ਆਪਣੀ ਆਪਣੀ ਯੋਗਤਾ ਦੇ ਆਪਣੇ ਆਪਣੇ ਆਰਾਮ ਦੇ ਸੁੱਖ ਖਾਣਾ ਸੁੱਖ ਭੋਗਣ ਔਰ ਖਾਣਾ ਜੋ ਖਾਣਾ ਉਹਦੇ ਵਿੱਚ ਵੀ ਦੁੱਖ ਹੈ ਭੋਗਣਾ ਉਹਦੇ ਵਿੱਚ ਵੀ ਦੁੱਖ ਹੈ ਖਾਣਾ ਕਾਲ ਹੈ ਖਾਣੇ ਦਾ ਭੋਗਣਾ ਕਾਲ ਭੋਗਣਾ ਮਾਇਆ ਦਾ ਹੈ ਸੋਈ ਦੁੱਖ ਜਰਬੇਦਰ ਭਾਈ ਔਰ ਕਰਬ ਜਿਹੜਾ ਹੈਗਾ ਹੋਰ ਵਧ ਜਾਂਦਾ ਹੈ ਪਹਿਲਾਂ ਹੀ ਸੀ ਗਰਭ ਵੱਧ ਗਿਆ ਹੋਰ ਵੱਧ ਗਿਆ ਗਰਭ ਹੈ ਗਰਭਾਈ ਗਰਭ ਛੱਡਣ ਦੀ ਕੋਈ ਗੱਲ ਨਹੀਂ ਕਰਦਾ ਅਗਰ ਜਿੱਦੀਆਂ ਫੱਤਾਂ ਵਾਲੇ ਨੇ ਗਰਭ ਨੂੰ ਘਟਾਉਣ ਦੀ ਕੋਈ ਗੱਲ ਨਹੀਂ ਕਰਦਾ ਅਗਰ ਕਰਦੇ ਗਰਭ ਵੱਧ ਰਿਹਾ ਘਟਾਉਣ ਦੀ ਗੱਲ ਇਹ ਨਹੀਂ ਕਰਦੇ ਠੀਕ ਹੈ ਨਾਨਕ ਨਾਮ ਨਾ ਚੇਤੇਉ ਅੰਤ ਛਡਾਈ ਆਦਿਕ ਨਾਮ ਦਾ ਚੇਤੇ ਨਾਮ ਹੀ ਕਹਿੰਦਾ ਉਹ ਬਲੀਚਿਆ ਜਿਹੜਾ ਅੰਤ ਵੇਲੇ ਛਡਾ ਲੈਂਦਾ ਉਹ ਚੇਤਾ ਹੀ ਨਹੀਂ ਉਸ ਨੂੰ ਪਦਾ ਉਹਦਾ ਚੇਤ ਉਹਦੇ ਵਾਸਤੇ ਚੇਤਨਾ ਨਹੀਂ ਸਮਝੇ ਨਹੀਂ ਆਈ ਜਿਹੜਾ ਅੰਤ ਵੇਲੇ ਛਡਾਉਂਦਾ ਫਿਰਦੇ ਰਹੇ ਹੋਰੇ ਗਿਆਨ ਲਈ ਫਿਰਦੇ ਰਹੇ ਹੋਰੇ ਬੱਤਾ ਮਗਰ ਲੱਗੇ ਰਹੇ ਹੋਰੇ ਕੋਚਾ ਇਲਾਜ ਕਰਦੇ ਰਹੇ ਉਸ ਨਾਮ ਦਾ ਚੇਤਾ ਨਹੀਂ ਆਇਆ ਜਿਹੜਾ ਅੰਤ ਵੇਲੇ ਛਡਾ ਲੈਂਦਾ ਇਹ ਗੁਰਮਤਿ ਨਾਮ ਦੀ ਗੱਲ ਹੈ ਇਹ ਅੱਜ 24ਵੀਂ ਪੌੜੀ ਦੀ ਸਮਾਪਤੀ ਹੈ ਜੀ। ਹੋਜੀ।